ਬੇਸ਼ੱਕ ਥੋੜਾ ਜਿਹਾ ਟਾਈਮ ਜ਼ਿਆਦਾ ਲੈ ਲਿਆ ਇਹਨਾਂ ਨੇ ਲੇਕਿਨ ਦਿਲ ਕਰਦਾ ਸੀ ਹਲੇ ਹੋਰ ਵਜਾਈ ਜਾਣ ਇਹ ਸਤਗੁਰ ਜਗਜੀਤ ਸਿੰਘ ਦੀ ਆ ਕਿਰਪਾ ਜੇ ਨੂੰ ਅਸੀਂ ਕਿਹਾ ਸਕਦੇ ਆ ਸੋ ਜਿਸ ਤਰ੍ਹਾਂ ਉਸਤਾਦ ਹਰਪ੍ਰੀਤ ਸਿੰਘ ਨੇ ਸਿੰਘ ਜੀ ਨੇ ਪਹਿਲਾਂ ਦੱਸਿਆ ਕਿ ਸੰਤ ਖਜਾਨ ਸਿੰਘ ਜੀ ਕੋਈ ਖਾਸ ਕਰਕੇ ਰੂਪਕਟਾਲ ਦੇ ਵਿੱਚ ਉਹਦੇ ਵਿੱਚ 8 ਮਾਤਰੇ 16 ਮਾਤਰੇ 12 ਮਾਤਰੇ ਆਹੋ ਜਿਹੀ ਚੀਜ਼ਾਂ ਵਾਹ ਦਿੰਦੇ ਸਨ ਸਵਾਰੀ ਕਰਦੇ ਸੀ ਜਿਹਨੂੰ ਸਵਾਰੀ ਕਹਿੰਦੇ ਆ ਤੇ ਇਹਨਾਂ ਨੇ ਵੀ ਅੱਜ ਰੂਪਕਤਾ ਇਹਨਾਂ ਪਾਸੀ ਵੀ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਥੋੜਾ ਬਹੁਤਾ ਧਿਆਨ ਸਾਡੇ ਵੱਲ ਇੱਥੇ ਬੱਚਿਆਂ ਵੱਲ ਧਿਆਨ ਦਿਆ ਕਰੋ ਕਿਉਂਕਿ ਤੁਹਾਡੇ ਪਾਸ ਗੋਣ ਬਹੁਤ ਹਨ ਸਿਰਫ ਹੁਣ ਥੋੜੇ ਥੋੜੇ ਜੇ ਆਪ ਬੰਦਣੇ ਸ਼ੁਰੂ ਕਰੋ ਤੇ ਬੜੀ ਅੱਛੀ ਗੱਲ ਹੈ ਇਹ ਰਿਕੁਐਸਟ ਹੈ ਹੁਣ ਜੋ ਅਗਲਾ ਮੈਂ ਹੁਣ ਬਹੁਤਾ ਟਾਈਮ ਨਾ ਲਵਾਂਗਾ ਥੋੜਾ ਲੇਟ ਹੈ ਤੇ ਜੋ ਅਗਲਾ ਪ੍ਰੋਗਰਾਮ ਆਪਾਂ ਸ਼ੁਰੂ ਕਰਨਾ ਹੈ ਸੋ ਸਾਡੇ ਨੌਜਵਾਨ ਜੋ ਬੱਚੇ ਹਨ ਉਹਨਾਂ ਨੇ ਇੱਕ ਬਹੁਤ ਅੱਛਾ ਅਪਰਾਲਾ ਕੀਤਾ ਹੈ ਨਾਲ ਸੰਤ ਹਰਪ੍ਰੀਤ ਸਿੰਘ ਜੀ ਨੇ ਜੋ ਇਹ ਸੰਤ ਖਜਾਨ ਸਿੰਘ ਜੀ ਦੀ ਵੀਡੀਓ ਟੇਪ ਤਿਆਰ ਕੀਤੀ ਹੈ ਉਹ ਮੈਂ ਇਹਨਾਂ ਪਾਸ ਬੇਨਤੀ ਕਰਾਂਗਾ ਕਿ ਹੁਣ ਉਹ ਸ਼ੁਰੂ ਕਰਨ ਤੇ ਉਸ ਤੋਂ ਬਾਅਦ ਅਗਲਾ ਸਿਰਫ 40 ਮਿੰਟ ਦੀ ਹੈ ਸਾਧ ਸੰਗਜਿਓ ਔਰ ਮੈਂ ਅਸ਼ੋਰ ਕਰਦਾ ਕਿ ਆਪ ਜੀ ਸਾਰੇ ਇੰਜੋਏ ਕਰੋਗੇ ਕਰੋ ਸਕਾਇਓ ਸਾਧ ਸੰਗਜਿਓ ਬੜੀ ਨਿਮਰਤਾਪੂਰਵਕ ਆਪ ਨੂੰ ਸਤਿ ਸ੍ਰੀ ਅਕਾਲ ਮਿਹਨਤੀ ਹੈ ਕਿ ਸਮਾਂ ਤੇ ਬਹੁਤ ਹੋ ਗਿਆ ਹੈ ਸੋ ਦਾਸ ਨੂੰ ਹੁਕਮ ਹੈ ਆਪ ਜੀ ਦੇ ਮਿੰਟ ਹੋਰ ਲੈਣ ਵਾਸਤੇ ਦੇਖੋ ਆਪਾ ਜਿਹਨਾਂ ਦੀ ਯਾਦ ਵਿੱਚ ਬੈਠੇ ਆ ਤੁਸੀਂ ਉਹਨਾਂ ਦੇ ਦਰਸ਼ਨ ਵੀ ਕਰ ਲੈਣੇ ਦੇਖ ਲਓ ਤੇ ਆਪਣੇ ਸਤ ਸਰਜੀਤ ਸਿੰਘ ਮੱਤੂ ਦੇ ਉਹਨਾਂ ਦੇ ਵੀ ਤੁਸੀਂ ਦਰਸ਼ਨ ਕਰ ਲੈਣੇ ਜਿਹੜੇ ਇਸ ਵੇਲੇ ਸਾਡੇ ਪਾਸ ਹੈ ਨਹੀਂ ਸੋ ਇਹ ਬੜਾ ਸੁਹਾਣਾ ਸਮਾ ਹੈ ਜਿਹੜਾ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ ਕਿਉਂ ਕਿਸੇ ਦੀ ਯਾਦ ਚ ਬੈਠ ਕੇ ਉਹਦੇ ਕੋਈ ਗੁਣ ਗਾਣਾ ਉਹਦਾ ਕੋਈ ਜਸ ਕਰਨਾ ਇਹ ਬਾਣੀ ਵਿੱਚ ਤੇ ਬੜੀ ਵੱਡੀ ਮਹਤਾਜ ਦਿੱਤੀ ਹੈ ਉਹਦੇ ਤੇ ਵੀ ਕਿਹਾ ਜਿਹੜਾ ਸਤਿਗੁਰੂ ਨੂੰ ਧੰਨ ਕਹਿੰਦਾ ਹੈ ਉਹਦੇ ਜਮ ਜਮ ਨੇੜ ਨਹੀਂ ਹੁੰਦਾ ਪਰ ਜਿਹੜਾ ਸਤਿਗੁਰ ਸਿੱਖ ਹੁੰਦਾ ਉਸੇ ਤਰੀਕੇ ਪਹੁੰਚੇ ਹੁੰਦੇ ਨੇ ਉਹ ਵੀ ਘਾਟੋ ਸ਼ਕਤੀ ਵਾਲੇ ਮਾਲਕ ਨਹੀਂ ਹੁੰਦੇ ਸਤਿਗੁਰ ਜੀ ਨੇ ਤੇ ਇਹ ਵੀ ਕਿਹਾ ਕਿ ਜਿੱਥੇ ਗੁਰੂ ਦਾ ਸਿੱਖ ਪੈਰ ਰੱਖਦਾ ਹੈ ਉਥੇ 86 ਤੀਰ ਦਾ ਫਲ ਉਪਰਾਪਤ ਹੁੰਦਾ ਸੋ ਰਾਗੀ ਖਜਾਨ ਸਿੰਘ ਜੀ ਨੂੰ ਦਾਸ ਨੂੰ ਇਹ ਉਹਨਾਂ ਨੂੰ ਨੇੜੇੋਂ ਦੇਖਣ ਦਾ ਕਾਫੀ ਸਮਾਂ ਪ੍ਰਾਪਤ ਹੋਇਆ ਹੈ ਕਿਉਂਕਿ ਪਹਿਲੇ ਸਮੇਂ ਜਦੋਂ ਦੌਰੇ ਹੁੰਦੇ ਸੀ ਤੇ ਰਾਗੀ ਤੇ ਸੰਤ ਗੋਪਾਲ ਸਿੰਘ ਜੀ ਇਹ ਦਾਸਿਕ ਰਿਆ ਦੀ ਕਿਰਪਾ ਦੁਆਰਾ ਯਾਨੀ ਕਿ ਦਾਸ ਇੱਕ ਮਹਾਨਤਾ ਸੀ ਤੇ ਉੱਥੇ ਉਹਨਾਂ ਦਾ ਡੇਰਾ ਹੁੰਦਾ ਸੀ ਤੇ ਇਸ ਕਰਕੇ ਕਾਫੀ ਉਹਨਾਂ ਨੇ ਬਚਨ ਕੋਈ ਸਮਾਂ ਤੇ ਬਹੁਤ ਹੁੰਦਾ ਸੀ ਉਸ ਵੇਲੇ ਤੇ ਕਾਫੀ ਉਹਨਾਂ ਨਾਲ ਦੱਸੇ ਸੀ ਪਰ ਦਾਸ ਸਾਹਿਬ ਜੀ ਨੂੰ ਜ਼ਿਆਦਾ ਸਮਾਂ ਨਹੀਂ ਮਿਲਦਾ ਦਾਸ ਇਹਨਾਂ ਨਾਲ ਉਹ ਇੱਕ ਤੋਂ ਬਚਨ ਪੁੱਛੇ ਸੀ ਜਿਹੜੇ ਉਹ ਦੋਹਾਂ ਦੱਸੇ ਸੀ ਉਹ ਦਾਸ ਸਾਹਿਬ ਜੀ ਨੂੰ ਦੱਸਦਾ ਹੈ ਪਹਿਲਾਂ ਤਾਂ ਉਹਨਾਂ ਦਾਸ ਨੇ ਪੁੱਛਿਆ ਵੀ ਤੁਹਾਨੂੰ ਇੰਨੀ ਵਿਦਿਆ ਹੈਗੀ ਤੁਸੀਂ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਾ ਸੰਗ ਜੀ ਸਿਰ 2 ਮਿੰਟ ਲਾਣੇ ਸਿਰ ਮੈਂ ਫਿਕਰ ਨਾ ਕਰੋ ਔਰ ਇਹ ਵੀ ਬਚਨ ਸੁਣਨ ਵਾਲਾ ਹੈ ਕਿਉਂਕਿ ਉਹਨਾਂ ਸੰਤਾਂ ਨੇ ਦੱਸਿਆ ਕਿ ਕਦੇ ਤੁਹਾਨੂੰ ਕਿਤਾਬਾਂ 'ਚ ਨਹੀਂ ਮਿਲਣਾ ਹੈਗਾ ਨਾ ਕਿਸੇ ਸਾਖੀਆਂ 'ਚ ਮਿਲਣਾ ਹੈਗਾ ਇਹ ਤਾਂ ਜ਼ੁਬਾਨੀ ਹੈ ਤੇ ਜ਼ੁਬਾਨੀਆਂ ਚਲੇ ਜਾਣਾ ਹੈ ਕਿਉਂਕਿ ਲਿਖੇ ਸਾਡੇ ਵੀ ਕੋਈ ਨਹੀਂ ਲਿਖ ਰਿਹਾ ਵੀ ਜਿਹੜੇ ਇਹ ਚੀਜ਼ਾਂ ਲਿਖੇ ਕਿਉਂਕਿ ਇਸਤੇ ਨੇ ਮਿਹਨਤ ਨਹੀਂ ਨਾ ਕੀਤੀ ਸੋ ਉਹਨਾਂ ਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਇੱਕ ਸਿੱਖ ਨੂੰ ਕਿੰਨੇ ਕਿੰਨੇ ਮੁਸਲਮਾਨਾਂ ਨਾਲ ਲੜਾਇਆ ਪਹਿਨ ਜੀ ਥੋੜੀ ਦੋ 1 ਮਿੰਟ ਦੋ ਠਹਿਰ ਸਿਰ 2 ਮਿੰਟ ਲੈਣੇ ਆ ਬੀਵੀਆਂ ਕਾਹਨ ਗੱਲ ਸੁਣਦੀਆਂ ਪਲੀਜ਼ ਇੱਕ ਸਿੱਖ ਨੂੰ ਇੱਕ ਸਿੱਖ ਨੂੰ ਕਿੰਨਾ ਮੁਸਲਮਾਨਾਂ ਦੇ ਨਾਲ ਕਿੰਨਿਆਂ ਕਿੰਨਾਂ ਨਾਲ ਲੜਾਇਆ ਇਹ ਤੁਸੀਂ ਦੇਖੋ ਇਸ ਸੋਚਣ ਵਾਲੀ ਗੱਲ ਹੈ ਕਿ ਅਸੀਂ ਵੀ ਉਹੀ ਸਿੱਖ ਹੈਗੇ ਆ ਸਾਨੂੰ ਉੱਥੇ ਸਕਿਨ ਹੈਡਾਂ ਕਿਤੇ ਪੇੜ ਮਾਰ ਕੇ ਤੇ ਸਾਡੀ ਪੱਗ ਲਾ ਕੇ ਲੈ ਜਾਂਦੇ ਅਸੀਂ ਵੀ ਤਾਂ ਸਿੱਖ ਖਵਾਨੇ ਆ ਉਹ ਸਿੱਖ ਕਹਿੰਦੇ ਕਿਦਾਂ ਸੀ ਉਹਨਾਂ ਚ ਸ਼ਕਤੀ ਸੀ ਇਹ ਵਿਚਾਰਨ ਵਾਲੀ ਗੱਲ ਆ ਥੋੜੀ ਔਰ ਅਸੀਂ ਵੀ ਆਪਣਾ ਸਿੱਖ ਖਵਾਨੇ ਆ ਗੁਰੂ ਵਾਲੇ ਵੀ ਖਵਾਨੇ ਆ ਬਾਣੀ ਵੀ ਪੜਦੇ ਆ ਨਾਮ ਵੀ ਜਪਦੇ ਆ ਪਰ ਸਾਡੇ ਚੋ ਚੀਜ਼ ਨਹੀਂ ਹੈ ਉਹਨਾਂ ਨੇ ਦੱਸਿਆ ਜੀ ਜਿਸ ਵੇਲੇ ਲੜਾਈ ਚ ਜਾਂਦੇ ਸੀ ਨਾ ਉਹ ਤਾਂ ਖਾਸ ਤਾਲ ਵਜਾਇਆ ਜਾਂਦਾ ਸੀ ਔਰ ਉਹਨਾਂ ਦੇ ਜਿਹੜੇ ਡੋਰੇ ਡੋਲੇ ਸੀ ਨਾ ਇਹ ਫੜਕਣ ਲਾ ਪੈਂਦੇ ਸੀ ਫਿਰ ਉਹਨਾਂ ਨੇ ਵਜਾ ਕੇ ਦੱਸਿਆ ਜਿੰਦਾਜ ਵਜਾ ਰਹੇ ਤਾਂ ਉਹ ਸਪੈਸ਼ਲ ਬੋਲ ਨੇ ਜਿਹੜੇ ਵਜਾਂਦੇ ਸੀ ਤਾਂ ਉਹਨਾਂ ਦੇ ਕੰਨ ਜਿਵੇਂ ਰਾਣਪੂਬੀ ਨੂੰ ਜਾਣ ਵਾਲੇ ਯੋਧੇ ਚ ਕੰਨ ਚ ਪੈਂਦੇ ਸੀ ਬਸ ਆਟੋਮੈਟਿਕਲ ਨੂੰ ਪਤਾ ਹੀ ਨਹੀਂ ਰਹਿੰਦਾ ਮੈਂ ਕੌਣ ਹਾਂ ਕਿੱਥੇ ਨਹੀਂ ਬਸ ਉਹ ਐਸਾ ਸੂਰਮਾ ਬਣ ਜਾਂਦਾ ਸੀ ਬਸ ਜਾ ਕੇ ਦੁਸ਼ਮਣਾਂ ਦੇ ਆਹੂ ਲਾ ਦਿੰਦਾ ਸੀ ਇਹ ਕਹੇ ਨਾ ਚੀਜ਼ ਦਸੀ ਸੀ ਦਾਸ ਇਹਨਾਂ ਨੂੰ ਇਹ ਪੁੱਛਿਆ ਤੀਨੀ ਬਚਨ ਤੁਹਾਨੂੰ ਆਪੇ ਦੱਸਣੇ ਕਿ ਤੁਹਾਡਾ ਸਤਗੁਰੂ ਨਾਲ ਕਿੰਨਾ ਕੁ ਪਿਆਰ ਸੀ ਵਾਪਸ ਆਰੇ ਕਹਿੰਦੇ ਉਹਨਾਂ ਨਾਲ ਪਿਆਰ ਬਹੁਤ ਸੀ ਪਰ ਉਹਦੀ ਕਿੰਨੀ ਕੁ ਲਿਮਟ ਹੈ ਇਹ ਵੀ ਦੇਖੋ ਆਪਾਂ ਵੀ ਸਤਗੁਰੂ ਵਾਲਿਆਂ ਸਤਗੁਰੂ ਸਾਨੂੰ ਵੀ ਪਿਆਰ ਕਰਦੇ ਨੇ ਅਸੀਂ ਸਤਗੁਰੂ ਨੂੰ ਪਿਆਰ ਕਰਦੇ ਆ ਪਰ ਉਹਨਾਂ ਦਾ ਪਿਆਰ ਜੋ ਉਹਨਾਂ ਨੇ ਦੱਸਿਆ ਉਹ ਕਹਿੰਦੇ ਇੱਕ ਵਾਰੀ ਉਹ ਬਿਮਾਰ ਹੋ ਗਏ ਬਹੁਤ ਜ਼ਿਆਦਾ ਬਿਮਾਰ ਹੋ ਗਏ ਪੁਖਾਰ ਚੜ ਗਿਆ ਤੇ ਸਤਗੁਰੂ ਜੀ ਕਬਰ ਲੈਣ ਵਾਸਤੇ ਆਏ ਆ ਕੇ ਕਹਿੰਦੇ ਕਿ ਤੁਹਾਡਾ ਕੀ ਹਾਲ ਹੈ ਉਹ ਕਹਿੰਦੇ ਮੈਨੂੰ ਕਿਹਾ ਵੀ ਤੁਹਾਨੂੰ ਹਾਲ ਦਾ ਪਤਾ ਹੈ ਦੇਖੋ ਬਾਹਰ ਬੁਖਾਰ ਬਹੁਤ ਚੜਿਆ ਆਇਆ ਹੂੰ ਤੁਸੀਂ ਆਗੇ ਬੁਖਾਰ ਲਾ ਦਿਓ ਸਤਗੁਰੂ ਜੀ ਕਹਿੰਦੇ ਠੀਕ ਆ ਉਹ ਕਹਿੰਦੇ ਫਿਰ ਸਿੱਧਾ ਹੋ ਕੇ ਲੰਮਾ ਪੈ ਜਾ ਸਤਗੁਰੂ ਜੀ ਉੱਤੇ ਫੇ ਉਸੇ ਤਰ੍ਹਾਂ ਲੰਮੇ ਪੈ ਗਏ 2 ਕੁ ਮਿੰਟ ਫਿਰ ਸਤਗੁਰੂ ਜੀ ਉੱਠ ਖੜਾ ਤੇ ਸੰਤਾਰਾ ਸਾਰਾ ਬੁਖਾਰ ਲੱਥ ਗਿਆ ਇਹ ਹੈਗਾ ਪਿਆਰ ਦੀ ਨਿਸ਼ਾਨੀ ਫਿਰ ਆਸ ਨੂੰ ਪੁੱਛਿਆ ਕਿ ਤੁਸੀਂ ਇਹ ਪਿਆਰ ਦੀ ਤਾਂ ਨਿਸ਼ਾਨੀ ਦਸੀਏ ਤਾਂ ਥੋੜੀ ਦੂਸਰਾ ਉਹ ਉਹਨਾਂ ਰਾਸ ਰਸਤੇ ਵੀ ਕਾਫੀ ਇਸ ਪਾਸੇ ਸੀ ਇਮਾਰਤ ਮੈਂ ਕਿਹਾ ਕੁਝ ਸਤਗੁਰਾਂ ਨੇ ਕਦੇ ਝੜਕੂ ਵੀ ਤੁਹਾਡੀ ਹੋਈ ਹੈ ਕਿਉਂਕਿ ਤੁਹਾਨੂੰ ਉਹਨਾਂ ਦਾ ਉਹਨਾਂ ਦਾ ਸੁਭਾਅ ਐਸਾ ਸੀ ਕਿ ਪ੍ਰੇਮ ਦੇ ਨਾਲ ਉਹ ਸਭ ਕੁਝ ਕਰ ਸਕਦੇ ਜਿੱਥੇ ਪ੍ਰੇਮ ਹੈ ਨਾ ਉੱਥੇ ਗੁੱਸਾ ਨਹੀਂ ਹੁੰਦਾ ਉਹ ਕਹਿੰਦੇ ਇਹ ਵੀ ਗੱਲ ਹੋ ਚੁੱਕੀ ਹੈ ਤੇ ਸਤਗੁਰਾਂ ਨੇ ਕਿਹਾ ਇੱਕ ਵਾਰੀ ਕਹਿੰਦੇ ਦੋਹਰੋਂ ਸਤਗੁਰ ਜੀ ਤੇ ਮਹਾਰਾਜ ਜੀ ਬੈਠੇ ਸੀਗੇ ਮੈਨੂੰ ਕਹਿੰਦੇ ਤਬਲਾ ਵਜਾਓ ਮੈਂ ਕਹਿੰਦਾ ਤਬਲਾ ਵਜਾਏ ਕਹਿੰਦੇ ਇਹ ਤਾਲ ਨਹੀਂ ਠੀਕ ਤੋਂ ਵਜਾ ਰਿਹਾ ਮੈਂ ਕਹਾਂ ਤੁਸੀਂ ਆਪਣੇ ਭਰਾ ਨੂੰ ਦੇ ਦਿਓ ਤਬਲਾ ਦੇਖੋ ਯਾਨੀ ਇੰਨਾ ਸਤਗੁਰਾਂ ਨਾਲ ਬਚਨ ਕਰਨਾ ਸਾਡੀ ਸਾਡੇ ਕੋਲ ਤਾਂ ਜਾ ਕੇ ਮੱਥਾ ਟੇਕਣਾ ਬੜਾ ਮੁਸ਼ਕਲ ਹੈ ਜੇ ਸ ਉਹ ਕਹਿੰਦਾ ਕਿ ਫੇਰ ਕੀ ਹੋਈ ਗੱਲ ਉਹ ਕਹੇ ਹੋਏ ਕੋ 4 ਸਾਲ ਫੇਰ ਨਹੀਂ ਬੋਲੇ ਉਹ ਦੀਵਾਨ ਚ ਜਾਣਾ ਸਭ ਕੁਝ ਤਬਲਾ ਵਜਾਣਾ ਸੀ ਕੁਝ ਕਰਨਾ ਪਰ ਆਪਸ ਕੋਈ ਬੋਲ ਚਾਲ ਨਹੀਂ ਅੱਛਾ ਉਹ ਕਹਿੰਦਾ ਫੇਰ ਇੱਕ ਦਿਨ ਸੱਚੇ ਪਾਤਸ਼ਾਹ ਥਾਲ ਚ ਮਠਿਆਈ ਲੈ ਕੇ ਬਾ برفੀ ਲੈ ਕੇ ਉੱਥੇ ਟਾਕੇ ਤੇ ਲਿਆ ਗਿਆ ਕਹਿੰਦੇ ਖਜਾਨੇ ਸੇ ਮੂੰਹ ਖੋਲ ਉਹਨਾਂ ਨੇ ਟੁਕੜਾ ਫੜ ਕੇ ਕਹਿੰਦੇ ਮੂੰਹ ਖੋਲ ਤੇਰੇ ਮੂੰਹ ਚ ਪਾਣੀ ਹੈ ਕਹਿੰਦੇ ਮੈਂ ਵੀ ਟੁਕੜਾ ਫੜ ਕੇ ਮੈਂ ਕਹਿੰਦਾ ਪਹਿਲਾਂ ਤੁਸੀਂ ਮੂੰਹ ਖੋਲੋ ਮੇਰੇ ਤੁਹਾਡੇ ਮੂੰਹ ਚ ਪਾਣੀ ਹੈ ਸਤ ਕਰੋ ਮੂੰਹ ਖੋਲਿਆ ਉਹਨੇ ਮੂੰਹ ਚ ਪਾਤੀ ਉਹਨਾਂ ਨੇ ਉਹਦੇ ਮੂੰਹ ਚ ਪਾਤੀ ਕਹਿੰਦਾ ਬਸ ਆ ਸਾਡਾ ਤੋ ਇਹ ਪਿਆਰ ਦੀ ਦੇਖੋ ਕਿੰਨੀ ਕਿੰਨੀ ਉਚਾਈ ਦਾ ਪਿਆਰ ਹੈ ਇਹਦੇ ਚ ਸਾਨੂੰ ਸਿੱਖਣ ਵਾਲੀ ਚੀਜ਼ਾਂ ਕਿਹੜੀਆਂ ਹਨ ਪਹਿਲਾ ਤੇ ਚੀਜ਼ ਇਹ ਹੈ ਕਿ ਸਾਡੇ ਚ ਸਾਨੂੰ ਆਪਣੇ ਬੱਚਿਆਂ ਤੇ ਸਾਡਾ ਤਾਂ ਹੁਣ ਜੋ ਕੁਝ ਹੋ ਗਿਆ ਸੋ ਹੋ ਹੀ ਗਿਆ ਬੁੱਢੇ ਬਾਰੇ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਕੋਸ਼ਿਸ਼ ਕਰੋ ਕਿ ਸੰਗੀਤ ਦੇ ਵੱਲ ਜ਼ਰੂਰ ਪ੍ਰੇਰਕ ਲਿਆਓ ਦਾਸ ਨੂੰ ਯਾਦ ਇੱਥੇ ਇੱਕ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਹੁੰਦਾ ਸੀ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ ਪਰ ਦੋ ਦੋ ਘੰਟੇ ਵੀ ਲੱਗ ਜਾਂਦੇ ਸੀ ਇਹਨਾਂ ਸੰਤਾਂ ਨੂੰ ਪਤਾ ਸਾਰੇ ਜਾਣਦੇ ਨੇ ਹੁਣ ਉਹ ਬੱਚਿਆਂ ਦਾ ਪ੍ਰੋਬਲਮ ਕਰਕੇ ਫਿਰ ਹੁਣ ਤੂੰ ਸ਼ਬਦ ਪੜ੍ਹੋ ਕਿਉਂਕਿ ਬੱਚੇ ਹੋ ਰਹੇ ਨਹੀਂ ਇਹ ਨਹੀਂ ਹੋਣਾ ਚਾਹੀਦਾ ਇਹ ਸਾਡੀ ਆਪਣੀ ਕਮਜ਼ੋਰੀ ਹੈ ਸਾਧ ਜੀ ਬੱਚਿਆਂ ਦਾ ਕੋਈ ਫਾਲਟ ਨਹੀਂ ਇਹਦਾ ਅਸੀਂ ਬੱਚਿਆਂ ਨੂੰ ਇਸ ਪਾਸੇ ਲਿਆਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦੇ ਜੇ ਅਸੀਂ ਬੱਚਿਆਂ ਨੂੰ ਇਸ ਪਾਸੇ ਲਿਆਏ ਸਾਡੇ ਸੰਸਰਜੀਤ ਸਿੰਘ ਹਣੀਆਂ ਦੇਖੋ ਇਹਨਾਂ ਨੂੰ ਪੁੱਛ ਲਓ ਕਿੰਨੇ ਕੋ ਬੱਚੇ ਆਉਂਦੇ ਨੇ ਬੱਚੇ ਸਾਡੇ ਸਾਰਿਆਂ ਦੇ ਹੈਗੇ ਨੇ ਕਿ ਬੱਚੇ ਕਿੱ데 ਚਲੇ ਗਏ ਨੇ ਬੱਚੇ ਤਾਂ ਹੈਗੇ ਹੀ ਨੇ ਉਹੀ ਬੱਚੇ ਹੁੰਦੇ ਹੁਣ ਨਹੀਂ ਉਹ ਇੰਟਰਸਟ ਲੈਂਦੇ ਇਹਦਾ ਮਤਲਬ ਹੈ ਕਿ ਮਾਪੇ ਬੋਲੋਂ ਉਹਨਾਂ ਨੂੰ ਕੋਈ ਇਹਨਾਂ ਦਲਾਸਾ ਜਾਂ ਉਤਸ਼ਾਹ ਨਹੀਂ ਦਿੱਤਾ ਜਾਗਾ ਤੋ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲੈਂਦਾ ਬਹੁਤ ਆਪ ਦਾ ਧੰਨਵਾਦ ਹੈ ਕਿ ਆਪ ਨੇ ਦਾਸ ਤੋਂ ਥੋੜਾ ਜਿਆਦਾ ਸਮਾਂ ਦਿੱਤਾ ਹੈ ਪਰ ਇਸ ਪਾਸੇ ਜ਼ਰੂਰ ਤਵਜਹ ਦਿਓ ਕਿ ਆਪਾਂ ਜੇ ਦੇਖੋ ਆਪਾਂ ਕਹਿੰਦੇ ਸਰਦਾਂਝਲੀ ਸਰਦਾਂਝਲੀ ਕਹਿੰਦੇ ਕਿ ਨੂੰ ਸਾਧ ਜੀ ਸਰਦਾ ਤੋਂ ਸਰਦਾਂਝਲੀ ਆ ਸਰਦਾ ਦੇ ਫੁੱਲ ਤੇ ਉਹਨਾਂ ਦੀ ਯਾਦ ਨੂੰ ਆਪਾਂ ਭੇਟ ਕਰਨੇ ਨੇ ਤੋ ਉਹ ਇਹੀ ਹੈ ਕਿ ਉਹਨਾਂ ਦੇ ਜੀਵਨ ਚੋਂ ਕੁਝ ਸਿੱਖੀ ਸਿੱਖਿਆ ਇਹ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਤਾਲੀਮ ਰਾਗ ਦੀ ਦਿਓ ਕਿਉਂਕਿ ਬਾਕੀ ਦੀ ਯੂਨੀਵਰਸਿਟੀ ਜਾ ਕੇ ਸਭ ਕੁਝ ਸਿੱਖ ਲੈਣਾ ਪਰ ਆ ਨਹੀਂ ਕਿਤੇ ਮਿਲਦਾ ਸ세 ਕਾਲ